ਸ੍ਰੀ ਲੋਕ ਮਹੱਲਾ ਪਹਿਲਾ ਧੰਨ ਸੁ ਕਾਗਦ ਕਲਮ ਧੰਨ ਧੰਨ ਭਾਂਡਾ ਧੰਨ ਮਸ ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਕਾਗਦ ਉਹ ਕਾਗਦ ਵੀ ਧੰਨ ਕਲਮ ਧੰਨ ਕਲਮ ਵੀ ਧੰਨ ਹੈ ਭਾਂਡਾ ਉਹ ਭਾਂਡਾ ਵੀ ਧੰਨ ਜੀ ਜਸਾਈ ਹੈ ਧੰਨ ਮਸ ਉਹ ਸਿਆਹੀ ਵੀ ਧੰਨ ਤਾਨੇ ਲਿਖਾਰੀ ਲਿਖਣ ਵਾਲਾ ਵੀ ਤੁਹਾਨੂੰ ਲੋੜ ਦਾ ਜਿਹਨੇ ਲੋੜ ਵੀ ਲਖਾਇਆ ਸੱਚ ਇਹ ਜਿਹਨੇ ਆ ਜਿਹੜੇ ਅੱਖਰ ਦੇ ਗੁਰਬਾਣੀ ਦੇ ਅੱਖਰ ਲਿਖੇ ਨੇ ਸੱਚ ਦੀ ਬਾਣੀ ਲਿਖੀ ਹੈ ਲਿਖਦੇ ਨੇ ਉਹ ਧਨ ਭਾਗੀ ਨੇ ਲਿਖਦੇ ਲਿਖਦੇ ਹੀ ਸਮਝ ਜਾਣਗੇ ਲਿਖਦੇ ਲਿਖਦੇ ਹੀ ਪੜ ਵੀ ਲੈਣਗੇ ਸਮਝ ਵੀ ਜਾਣਗੇ ਹਾਂਜੀ ਅਤ ਸੋ ਇੱਕ ਕਲਮ ਤੇ ਭਾਂਡਾ ਮਸ ਇਹ ਤਾਂ ਜੜ ਹੈ ਨਾ ਜੀ ਟਾੜੀ ਦੇ ਕਹਿੰਦੇ ਦਰਖਤ ਆ ਉਹ ਨੂੰ ਤੁਸੀਂ ਸਮਝਦੇ ਹੋ ਬਈ ਇਹ ਟਾੜੀ ਦੀਚ ਵਿੱਚ ਹੈ ਪਰ ਉਹਦੇ ਜੇ ਪੱਤਿਆਂ ਤੇ ਭਗੌੜ ਦੇ ਗੀਤ ਲਿਖੇ ਜਾਂਦੇ ਨੇ ਬਾਣੀ ਲਿਖੀ ਜਾਂਦੀ ਹੈ ਫਿਰ ਉਹਨੂੰ ਨਮਸਕਾਰ ਕਰਦੇ ਹੁ ਇਹਨੂੰ ਨਮਸਕਾਰ ਕਰਦੇ ਹੋ ਤੁਹਾਡੇ ਹੋ ਗਿਆ ਠੀਕ ਹੈ ਜੀ ਨਾਲ ਲਿਖਿਆ ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸਚ਼ ਫਿਰ ਲਿਖਾਰੀ ਔਰ ਨਾਮ ਲਿਖਾਉਣ ਵਾਲੇ ਅਲੱਗ-ਅਲੱਗ ਹੈ ਜੀ ਆਹੋ ਲਿਖਾਇਆ ਤੇ ਲਿਖਦਾ ਲਖਣ ਦਾ ਮਤਲਬ ਹੈ ਦੇਖਣਾ ਹੁੰਦਾ ਸਭ ਜੜਿਆ ਜੀ ਲਿਖਦੇ ਲਿਖਦੇ ਨੇ ਮੈਂ খালি ਲਿਖਣ ਵਾਲਾ ਹੋਇਆ ਗਿਆ ਨਾਮ ਉਹਨੇ ਸੱਚ ਲਿਖਦੇ ਲਿਖਦੇ ਨੇ ਦੇਖ ਦਰਸ਼ਨ ਵੀ ਕਰ ਲਿਆ ਨਾਮ ਦਾ ਜੋ ਲਿਖਦਾ ਉਹਦੇ ਚੋਂ ਉਹਦੇ ਚੋਂ ਗਿਆਨ ਜਿਹੜਾ ਲਿਖ ਰਿਹਾ ਜਿਹੜਾ ਵਿੱਚ ਗਿਆਨ ਦਿੱਤਾ ਹੈ ਅਖਰਾਨ ਦੇ ਉਹਦਾ ਉਹਨੂੰ ਸਮਝ ਵੀ ਆ ਜੀ। ਲਿਖ ਆਲੀ ਤਾਂ ਤਾਂ ਨਾ ਕਿ ਉਹਨੇ ਰੱਖ ਲਿਆ ਵਿੱਚੋਂ ਗਿਆਨ ਉਹਦੇ ਸੱਚ ਲੱਭ ਲਿਆ ਜੇ ਉਹਦੇ ਸੱਚ ਨੂੰ ਸਮਝ ਲਿਆ ਉਹਦੇ। ਲਖਣਾ ਸਮਝਣਾ ਹੁੰਦਾ। ਸਮਝ ਲੱਗੀ ਮੈਂ ਕੀ ਲਿਖ ਰਿਹਾ ਉਹ ਤਾਂ ਅੰਦ ਸਰ ਪਹਿਲਾਂ ਦੀ। ਅਨੁਮਾਨੇ ਨਹੀਂ ਪਰ ਹੁਣ ਅੱਜ ਕੱਲ ਤਾਂ ਕੋਈ ਲਿਖਦਾ ਹੀ ਨਹੀਂ ਹੈ ਸਭ ਕੁਝ ਛਾਪੇ ਵਾਲੀਆਂ ਬੀੜਾਂ ਤੇ ਇਹ ਫਿਰ ਇਹਦਾ ਮਤਲਬ ਆਪਾਂ ਨੂੰ ਬੀੜ ਲਿਖਣ ਨੂੰ ਵੀ ਗੁਰਬਾਣੀ ਲਿਖੋ ਉਹਦੇ ਨਾਲ ਭਾ ਉਹਦੇ ਨਾਲ ਕੋਈ ਫਰਕ ਪੈਗਾ ਲਿਖਣ ਮੇਰੇ ਲਿਖਦਾ ਹੱਥ ਨਾਲ ਉਹ ਲਿਖੀ ਹੋਈ ਚੀਜ਼ ਆ ਤੇ ਪੜ੍ਹੀ ਹੋਈ ਚੀਜ਼ ਲਿਖੀ ਹੋਈ ਜ਼ਿਆਦਾ ਕੋਈ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਹੂ ਬਹੂ ਲਿਖ ਸਕਦਾ ਹੋਊਗਾ ਕੋਈ ਚਾਹੇ ਸੰਤ ਮਹਾਤਮਾ ਕੋ ਹੋਵੇ ਕੌਣ ਲੈ ਨੇ ਹੈ ਦੀ ਨਾ ਫਰੋਹੀ ਵੀ ਇਸ ਪਾਸੇ ਨੂੰ ਬਿਲਕੁਲ ਧਿਆਨ ਨਹੀਂ ਹੈਗਾ ਇੱਥੇ ਤਾਂ ਲਿਖਾਰੀ ਲਿਖਿਆ ਹਾਂ ਸਮਝ ਜਿਆਦਾ ਹੁੰਦੀ ਹੈ ਸਮਝ ਕੇ ਲਿਖਦਾ ਹੈ ਅੰਕੜਾ ਕਿਉਂ ਨਹੀਂ ਪਾਉਣਾ ਕਿਉਂ ਪਾਇਆ ਕਿਉਂ ਆ ਫੈਰੀਆ ਨਹੀਂ ਤਾਂ ਪੜ ਕੇ ਦਾ ਰੇਲ ਗੱਡੀ ਚ ਸਫਰ ਕਰ ਲਿਆ ਹੋ ਗਏ ਹੋ ਗਏ ਜਿਹੜੇ ਯਹੂਦੀ ਲੋਕ ਹੈ ਉਹ ਆਪਣੀਆਂ ਖਾਸ ਜਿਹੜੇ ਗ੍ਰੰਥ ਹੈ ਔਰ ਰੋਲ ਵਾਲਾ ਕਾਗਜ਼ ਹੁੰਦਾ ਉਹਦੇ ਤੇ ਲਿਖਣਾ ਪੈਂਦਾ ਉਹਨਾਂ ਨੂੰ ਉਹ ਛਾਪੇ ਵਾਲਾ ਨਹੀਂ ਮੰਨਦੇ ਹਾਂਜੀ ਹਾਂਜੀ ਤੇ ਗੱਲ ਤੇ ਜ਼ਿਆਦਾ ਪਹਿਰਾ ਦੇ ਰਹਿਆ ਸਾਡੇ ਕੋਲ ਤਾਂ ਹੱਥ ਲਿਖਤ ਆ ਗਿਆ ਸਭ ਤੋਂ ਹੱਥ ਲਿਖਦਾ ਹੀ ਅਰਥ ਹੋ ਰਿਹਾ ਸੋ ਇਹ ਇੱਕ ਬੜਾ ਉਪਦੇਸ਼ ਦਿੱਤਾ ਸੀ ਕਿ ਸਿੱਖ ਨੂੰ ਗੁਰਬਾਣੀ ਲਿਖਣੀ ਆਉਣੀ ਚਾਹੀਦੀ ਹੈ ਜੇ ਲਿਖੂਗਾ ਤਾਂ ਉਹਨੂੰ ਪਤਾ ਲੱਗੂਗੀਏ ਆ ਕਿਉਂ ਐ ਆ ਕਿਉਂ ਨਹੀਂ ਹਾਂਜੀ ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ ਉਪਰ ਲੇਖ ਭੀ ਤੂੰ ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੂੰ ਆਪੇ ਪੱਟੀ ਕਲਮ ਆਪ ਉੱਧ ਡੇਰਾਕਾਰੀ ਦੁਨਜ ਜੇ ਜਾਈਏ ਇਹ ਤਾਂ ਬਹਾਨੇ ਕਾੜੀ ਦੀ ਗੱਲ ਨਾ ਤਦ ਵੀ ਉੱਥੇ ਆਪੇ ਹੈ ਕਲਮ ਵੀ ਆਪੇ ਆਪੇ ਪਟੀ ਕਲਮ ਆਪ ਜਦ ਉਹ ਲਿਖਦਾ ਹੈ ਨਾ ਸਾਡੇ ਕਰਮਾਂ ਤੇ ਲੇਖੇ ਜਦ ਉਹ ਜਿਹੜਾ ਭੇਜਦਾ ਨਾ ਲਿਖ ਕੇ ਬਾਣੀ ਤੁਰਕੀ ਉਹ ਜਿਹ ਨਹੀਂ ਹੁੰਦੇ ਅੱਖਰ ਇਹਦੇ ਸਿਆਹੀ ਕਾਲੀ ਵੀ ਹੁੰਦਾ ਉਥੇ ਆਪੇ ਪੱਟੀਆ ਕਲਮ ਵੀ ਆਪੇ ਹੁਕਮ ਹੈ ਕਲਮ ਕਾਲ ਕਲਮ ਹੁਕਮ ਹਾਥ ਉੱਪਰ ਲੇਖੀਆ ਉੱਪਰ ਲੇਖ ਵੀ ਤੂੰ ਪਤੂਏ ਲੇਖਾ ਤੇ ਇੱਕੋ ਕਈ ਹੈ ਨਾਂ ਦਾ ਦੂਜੇ ਦਾ ਇਹ ਕੋਈ ਹੈ ਉਥੇ ਦੀ ਨਾ ਕਾਗਜ਼ ਹੈ ਨਾ ਸਿਆਹੀ ਹੈ ਦੁਪੰਡਾ ਉਥੇ ਕੁਝ ਨਹੀਂ ਉਥੇ ਤੁਲੀ ਤੂਹ ਜਿਹੜਾ ਕਾਰੋ ਬਾਣੀ ਆਈ ਹੈ ਉਥੇ ਉਹ ਇਹ ਗੁਰਬਾਣੀ ਵਰਗੀ ਜੀ ਜਿਹੇ ਪਰ ਜੇ ਆਪ ਲਿਖਾਂਗੇ ਸਮਝਾਂਗੇ ਫਿਰ ਆ ਆਪਣੇ ਤੇ ਘਟਣਾ ਵਾਪਰੂਗੀ ਹਾਂ ਹਾਂ ਠੀਕ ਹੈ ਕਿਉਂਕਿ ਜੜ ਤੋਂ ਜੜ ਇੱਕਦਮ ਤੋੜ ਲਿਆ ਆਪਾਂ ਨੂੰ ਆਪੇ ਪੱਟੀ ਕਲ ਮਾਪ ਉੱਪਰ ਲੇਖ ਭੀ ਤੂੰ ਹਾਂਜੀ ਠੀਕ ਹੈ ਜੀ ਇਹ ਨਿਰਆਕਾਰੀ ਸਿਆਈ ਹੈ ਨਿਰਆਕਾਰੀ ਤਖਤੀ ਹੈ ਨਿਰਆਕਾਰੀ ਲਿਖਾਰੀ ਹੋ ਗਿਆ ਹੈ ਜੀ ਲਿਖਾਰੀ ਹੈ ਸਭ ਨਿਰਆਕਾਰੀ ਹੈ ਉੱਥੇ ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੋ ਦੂਜਾ ਹੈ ਕੋਈ ਕੋਈ ਕੀ ਜਾਉ ਹਾਂਜੀ ਕੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁਦ ਬਿਨ ਦੂਜਾ ਕੋ ਨਹੀਂ ਤੂੰ ਰਹਾ ਸਮਾਈ ਤੂੰ ਆਪਿਆ ਵਰਤਦਾ ਇੱਕਾ ਜਿਹੜਾ ਹੁਣ ਉਹਨੂੰ ਕਹੇ ਤੂੰ ਆਪਿਆ ਵਰਤਦਾ ਹੈ ਦੋ ਤੋਂ ਹੋ ਕੇ ਵੀ ਆਪੇ ਆਪ ਹੈ ਚਾਹੇ ਦੋ ਤੋਂ ਹੈ ਚਾਹੇ ਇੱਕ ਤੋਂ ਤੂੰ ਬੈਠ ਕੇ ਪਜਾਇਆ ਕਹੂੰ ਕੇ ਕਰਾਇਆ ਉਹ ਨਰਤ ਦਸਮ ਪਾਸ਼ ਵਾਲੇ ਨੂੰ ਲਿਖਿਆ ਉਹ ਸਭ ਇਹੀ ਬਣੂ ਕੀਤਾ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਆ ਜਿਹੜੀ ਬਣਤ ਬਣਾਈ ਹੈ ਸਰਸਰ ਵੀ ਰਚਨਾ ਉਹ ਵੀ ਟਾਈਮ ਵਿੱਚ ਇੱਕ ਤੋਂ ਦੋ ਹੋ ਗਿਆ ਤਾਂ ਆਪੇ ਬਣਾਈਏ ਨਿਰਗਾਲ ਦੀ ਬਣਾਈ ਉਹ ਵੀ ਤੂੰ ਤੇ ਮੈਨੂੰ ਦੂਜਾ ਕੋਈ ਦੂਜਾ ਕੋਈ ਵੀ ਨਹੀਂ ਕਿਤੇ ਦੂਜਾ ਕੋਈ ਵੀ ਕੋਈ ਜੀਵ ਉਹ ਤਾਂ ਸਾਰੇ ਨੇ ਥੋ ਤੇ ਬਿਨਾਂ ਦੂਜਾ ਕੋਈ ਨਹੀਂ ਤੂੰ ਹੈ ਸਮਾਈ ਤੁਦ ਕੀਮਤ ਪਾਈ ਤੂੰ ਅਲਖ ਅਗੋਚਰ ਅਗੰਮ ਹੈ ਗੁਰਮਤਿ ਦਿਖਾਈ ਤੇਰੀ ਗੱਟ ਮਤ ਤੂੰ ਜਾਣਦਾ ਉਹ ਆਪਣੇ ਮੂਲ ਨੂੰ ਕਹੇ ਵੀ ਤੇਰੀ ਗੱਤ ਮੈਨੂੰ ਤੋ ਹੀ ਜਾਣਦਾ ਤੁਦ ਕੀਮਤ ਪਾਈ ਚਾਹਉ ਕੀਮਤ ਪਾਈ ਆ ਜਿਹੜੀ ਗੁਰਬਾਣੀ ਲਿਖੀ ਇਹ ਗੁਰ ਸਤਗੁਰ ਦੀ ਲਿਖੀ ਹੋਈ ਹੈ ਉਹਨੇ ਲਿਖਾਈ ਜਾਂ ਤੈਨੇ ਲਿਖੀ ਹੈ ਦਿਖਣ ਵਾਲਾ ਜਿਹੜਾ ਤੈਂ ਕੀਮਤ ਆਪੇ ਪਾਈਆ ਤੈਂ ਬੁਲਾਇਆ ਤਾ ਬੋਲੇ ਕੋਈ ਉਹ ਅਲਖ ਅਗੋਚਰ ਅਗਭ ਅਲਖ ਵੀ ਹੈ ਅਗੋਚਰ ਵੀ ਹੈ ਕਹਦਾ 20 ਹੈ ਕਿਸੇ ਦੀ ਮਾਇਆ ਦੀਆਂ ਅੱਖਾਂ ਦੀ ਮਾਇਆ ਦੀ ਅਕਲ ਦੀ ਪਕੜ ਵਿੱਚ ਵਧੀ ਹੈ ਬੁੱਤੀ ਬਨ ਤੋਂ ਪਰੇ ਅੱਖਾਂ ਦੀ ਪਕੜ ਤੋਂ ਪਰੇ ਗੁਰਮਤੀ ਦਿਖਾਈ ਗੁਰਮਤ ਦੇ ਤਖਤਾ ਦਰਸ਼ਨ ਤਾਂ ਗੁਰਮਤਿ ਨੇ ਕਰਵਾਇਆ ਹੈ ਸਮਝਾਇਆ ਤਾਂ ਗੁਰਮਤਿ ਦੇ ਵਿੱਚ ਹੀ ਹੋਇਆ ਹੈ ਇਹ ਗੁਰਮਤਿ ਨੇ ਤਾਂ ਤੇਰਾ ਦਰਸ਼ਨ ਕਰਾਤਾ ਪਰ ਅੱਖੋਂ ਨਾਲ ਤੇਰਾ ਦਰਸ਼ਨ ਨਹੀਂ ਕੀਤਾ ਜਾ ਐਸਾ ਕਿਹਾ ਕਿਸੇ ਤੋਂ ਬੁੱਧੀ ਆਪਣੀ ਬੁੱਧੀ ਨਾਲ ਦੀ پکڑ ਤੇ ਵੀ ਬਾਹਰ ਹੈ ਅਗਮਰ ਹੈ ਅਗੋਚਾ ਦਾ ਮਤਲਬ ਹੈ ਕਿਸੇ ਦੇ ਗੋਚਰੇ ਕਿਸੇ ਦੇ ਅਧਿਤ ਵੀ ਤੂੰ ਨਹੀਂ ਹੈ ਇਹ ਸਭ ਕੁਝ ਗੁਰਮਤਿ ਨੇ ਸਮਝਾਇਆ ਦਿਖਾ ਦਿੱਤਾ ਗੁਰਮਤਿ ਨੇ ਇਹ ਗੱਤ ਨਾਲ ਮਿੱਤ ਲੱਗਿਆ ਮਿੱਤ ਦਾ ਕੀ ਭਾਵ ਹੁੰਦਾ ਜੀ ਮਿੱਤ ਜੋ ਬੋਲਦੇ ਵਿੱਚ ਸਾਡੇ ਆ ਅੱਛਾ ਮਰਿਆਦਾ ਤਾਂ ਨਹੀਂ ਹੁੰਦਾ ਮਿੱਤ ਨਾ ਨਾ ਮਿੱਤ ਉਹ ਮਰਿਆਦਾ ਦਾ ਕੀ ਮਰਿਆਦਾ ਦਾ ਬੈਨ ਤੇ ਗੱਤ ਨਾਲ ਮਿੱਤ ਆਉਂਦਾ ਤੇਰੀ ਗੱਤ ਤੇਰੀ ਗਤੀ ਔਰ ਮਿੱਤੀ ਤੇਰੇ ਮਨ ਚ ਕੀ ਹੈ ਤੂੰ ਜਾਣਦਾ ਇਹਦਾ ਇੱਕਾ ਉਹਦੇ ਕੋਈ ਨਹੀਂ ਜਾਣ ਸਕਦਾ ਉਹ ਸਾਲਿਆਂ ਦੀ ਜਾਣਦਾ ਪਰ ਕੁਝ ਲੋਕੀ ਦਾ ਅਰਥ ਮਿੱਥਦਾ ਮर्यादा ਵੀ ਕਰਦੇ। ਮर्यादा ਜਿਹੜੇ ਮर्याਦਾ ਨੂੰ ਗੁੱਸੇ ਨੇ ਉਹ ਕਰਦੇ ਨੇ ਮर्याਦਾ ਵੇਣ-ਵੇਡ ਹੈ। ਮर्याਦਾ ਆਪਣੀ ਆਪਣੀ ਹੈ। ਕੋਈ ਗੱਲ ਨਹੀਂ ਤੂੰ ਆ ਜਾਣਾ। ਮर्याਦਾ ਤਾਂ ਸਾਡੀ ਬਣਾਈ ਹੋਈ ਹੈ। ਗੱਲ ਹੈ? ਦਿੱਤਾ ਦਾ ਅਰਥ ਮਰਜੀ ਕਰ ਸਕਦੇ ਹੋ ਆਪਾਂ। ਅੱਛਾ ਜੀ। ਇੱਥੇ ਮੈਂ ਦੇਖਣਾ ਚਾਹੁੰਦਾ ਵੀ ਅਲੱਖ ਤੇ ਔਂਕੜ ਕਿਉਂ ਨਹੀਂ ਆ ਰਹੇ? ਮਿਸ ਕਰਤਾ ਕਿਤੇ ਲੱਗਦਾ। ਉਸਦਾ ਅਗੰਤੇ ਵੀ ਅਗੰਤੇ ਓਂਕੜ ਹੈ। ਤੇ ਪਿਛਲੇ ਤੇ ਵੀ ਹੈਗਾ। ਧੰਨ ਆ ਲਖ ਤੇ ਓਂਕੜ ਚਾਹੀਦਾ ਇਹ ਤਿੰਨ ਗੁਣ ਆ ਰਹੇ ਹਨ ਨਾ ਇਕੱਠੇ। ਹਾਂਜੀ ਫਿਰ ਹੁਣ ਇਹ ਧੰਨ ਲਖਾਰੀ ਵਾਲੀ ਗੱਲ ਨਹੀਂ ਨਾ ਹੋ ਰਹੀ ਤੂੰ ਅਲਖ ਅਗੋਚਰ ਅਗੰਮ ਹੈ ਅਲਖ ਤੇ ਓਂਕੜ ਚਾਹੀਦਾ ਗੁਰਮਤੀ ਦਿਖਾਈ ਕਹਿਣ ਦਾ ਭਾਵ ਵੀ ਦਰਸ਼ਨ ਬੁੱਧੀ ਨੂੰ ਹੀ ਹੋਣਾ ਹੈ ਜੀ। हां जी हां कोई ਅੱਖਾਂ ਨੂੰ ਦਰਸ਼ਨ ਨਹੀਂ ਹੋਣਾ ਕਿਉਂਕਿ ਇਹ ਜਿਹੜੇ ਤਿੰਨੇ ਗੁਣ ਹੈ ਇਹ ਅੱਖਾਂ ਤੋਂ ਤਾਂ ਪਰੇ ਜ਼ਰੂਰੀ ਹੈ ਕਿ ਗੁਰਮਤਿ ਨੇ ਹੀ ਦਿਖਾਉਣਾ ਦਰਸ਼ਨ ਤਾਂ ਗੁਰਮਤਿ ਦੇ ਥਰੂ ਹੋਣਾ ਕਿਸੇ ਹੋਰ ਤਰੀਕੇ ਨਾਲ ਨਹੀਂ ਹੋਣਾ ਕੋਈ ਟੋਪਕੇ ਦੀ ਲਿਆ ਹੋਇਆ ਕਿਸੇ ਦਾ ਇੱਕ ਗੁਰਬੰਦਾ ਟੋਪਕੇ ਹੈ ਆਰਾਮ ਗੁਰੂ ਆਪ ਆ ਸਾਰੇ ਆਦਮੀ ਨੂੰ ਫੇਰ ਉੱਥੇ ਬੰਦੇ ਨੂੰ ਲੈ ਕੇ ਖੜਾ ਕਰ ਦਿੰਦੇ ਜੀ ਪੂਰਤੀ ਪੂਜਾ ਫੇਰ ਸ਼ੁਰੂ ਹੋ ਜਾਂਦੀ ਨਾ ਐਤਵ ਗੁਰਮਤ ਦੀ ਸਟਰੰਗਨੈਸ ਗੁਰਮਤ ਦੀ ਜਿਹੜੀ ਕੀਮਤ ਸਾਹਮਣੇ ਆਉਂਦੇ ਗੁਰਮਤ ਤੋਂ ਬਿਨਾ ਦਰਸ਼ਨ ਹੋਈ ਨਹੀਂ ਸਕਦਾ ਹੈ ਜੀ ਨਹੀਂ ਉਹ ਦਰਖਦੇ ਜੀ ਹੋ ਸਕਦਾ ਠੀਕ ਹੈ ਜੀ ਅੰਤਰ ਅਗਿਆਨ ਦੁਖ ਭਰਮ ਹੈ ਗੁਰ ਗਵਾਈ ਜਿਸ ਕਿਰਪਾ ਕਰੇ ਤਿਸ ਮੇਲ ਅੰਦਰ ਕੀ ਅਗਿਆਨਤਾ ਪਰਮ ਦੁਖ ਰੂਪ ਨੇ ਪਰਮ ਦੁਖ ਰੂਪ ਹੈ ਪਰਮ ਵਿੱਚ ਭਇਆ ਹੈ ਦੁਖੁਦ ਅਗਿਆਨਤਾ ਕਰਕੇ ਤੇ ਇਹ ਜਾਊਗਾ ਕਿਹਦੇ ਨੂੰ ਗੁਰ ਗਿਆਨ ਕੋਈ ਗੁਰ ਗਿਆਨ ਗੁਰਮਤਿ ਵਿੱਚ ਹੈ ਜਿੱਥੇ ਗਿਆਨ ਨਹੀਂ ਹੈ ਉਹ ਧਰਮੇ ਨਹੀਂ ਬਣਿਆ ਹੋਇਆ ਕਬੀਰ ਦੇ ਗੁਰਮਤਿ ਵਿੱਚ ਗਿਆਨ ਹੈ ਬਾਹਲਾ ਫੇਰ ਵਿੱਚ ਕੋਈ ਗਿਆਨ ਨਹੀਂ ਮਿਲਦਾ ਊੜਵੋਲ ਨੂੰ ਕੋਈ ਗਿਆਨ ਨਹੀਂ ਮਿਲਦਾ ਪਤ੍ਰੋ ਜਿਹੜਾ ਪਰਮ ਦਾ ਨਾਮ ਸੁਣਨਾ ਉਹ ਤੇ ਬਾਅਦ ਸਮਝ ਲੋ ਦਰਸ਼ਕ ਸੁਝਉਣੀ ਹੈ ਸਮਝ ਆਉਣੀ ਹੈ ਦਰਸ਼ਕ ਦਰਸ਼ਨ ਦਾ ਆਪਣਾ ਨਹੀਂ ਕਰਨਾ ਆਤਮਾ ਆਪਣੇ ਆਤਮਾ ਦਾ ਹੀ ਕਰਦੇ ਹੋਰ ਕੀ ਦਾ ਕਰਨਾ ਦਰਸ਼ਕ ਜਿਸ ਕਿਰਪਾ ਕਰਨ ਕਿਸੇ ਪੇਲੇ ਤੋਂ ਲਾਭ ਤੇ ਆਈ ਜੇ ਤੇ ਕਿਰਪਾ ਉਸ ਹੈ ਜਿਹਨੂੰ ਗੁਰਬਾਣੀ ਜੀ ਸਮਝ ਆ ਜਾਂਦੀ ਹੈ ਗੁਰਬਾਣੀ ਉਹਨੂੰ ਮਿਲ ਜਾਂਦੀ ਹੈ ਪੜ੍ਹ ਲੂ ਸੁਣ ਲੂ ਅੱਗ ਤਾਂ ਪੈ ਜਾਂਦੀ ਹੈ ਸਮਝਣ ਵਾਲੀ ਜੇ ਹਾਲਾਤ ਬਣ ਜਾਂਦੇ ਨੇ ਉਹ ਤੇ ਕਿਰਪਾ ਹੁੰਦੀ ਹੈ ਉਹਨੂੰ ਵੇਖ ਲੈਣਾ ਸੋ ਨਾਮ ਤੇ ਆਈ ਉਹਦਾ ਹੀ ਰੋਗ ਤੇ ਜਿੰਦਗੀ ਉਹ ਰੋਗ ਦੀ ਕੱਟੀ ਖੜਦਾ ਉਹ ਗਿਆਨ ਤੇ ਕਮਾਈ ਕਰਦਾ ਉਹ ਆਪਣੇ ਅੰਦਰ ਭਰਮ ਦਾ ਨਾਸ ਕਰਦਾ ਦੁਨੀਆਂ ਭਰਮਾਂ ਆਪਣੇ ਬਧੋਉਂਦੀ ਹੈ ਇਹ ਭਰਮ ਨੇ ਭੁਲੀ ਦੇ ਸੌਂਦੀ ਹੈ ਉਹ ਭਰਮ ਦਾ ਨਾਸ ਕਰਦਾ ਜਿੱਤੇ ਕਿਰਪਾ ਹੁੰਦੀ ਹਾਂਜੀ ਠੀਕ ਹੈ ਗੁਰ ਗਿਆਨ ਗੱਲ ਆਈ ਹੈ ਦੁਬਾਰਾ ਹੈ ਨਾ ਜੀ ਗੁਰਬਾਣੀ ਤੇ ਗਿਆਨ ਨਾਲ ਗਵਾਇਆ ਜਾਊਗਾ ਬਿਲਕੁਲ ਤਾਂ ਹੀ ਉੱਤੇ ਕਿਹਾ ਤਾ ਨਾ ਇਹ ਤੇ ਤੈਨੂੰ ਸਰਦਾ ਦੀ ਕਿਉਂ ਗਿਆਨ ਕੇ ਤੋ ਹੋਰ ਬਿਲਣਾ ਹੀ ਨਹੀਂ ਹੈ ਹਾਂ ਜੀ ਤੂੰ ਕਰਤਾ ਪੁਰਖ ਅਗੰਮ ਹੈ ਰਬਿਆ ਸਭ ਤੂੰ ਜਿਹੜਾ करता ਪੁਰਖ है, ਤੂੰ तो सब ਢਾਹੀ ही ਭਈ ਹਾਂ सारे ਹਿਰਦਿਆਂ ਚ ਘਟ ਘਟ ਬਣ ਹਰ ਜੂ ਬਸ ਅਗਾ ਭਾ ਤਾਲ ਵੀ ਚਾਹੇ ਸਾਰਿਆਂ ਦੇ ਚ ਰਵਿਆ ਹੋਇਆ ਤਾਲ ਵੀ ਨਹੀਂ ਕੋਈ ਦੇਖ ਰਿਹਾ ਤਾਲ ਵੀ ਕੋਈ ਸਾਨੂੰ ਸਮਝ ਨਹੀਂ ਆ ਰਹੀ ਅਗਾ ਤਾ ਵੀ ਬਣੇ ਹੋਏ ਬੁੱਧੀ ਤੋਂ ਪਰੇ ਤਾ ਵੀ ਬਣੇ ਹੋਏ ਸਭੀ ਕਿ ਸਤਿਆ ਤੂੰ ਜਦ ਜਦ ਲਾਲਵੇਂ ਉਦਰੇ ਲੱਗਿਆ ਰਹਿੰਦਾ ਕਾਹ ਚਲ ਤੇਰਾ ਗੁਣ ਦਾ ਇਹਨੇ ਕਰਦਾ ਗੁਣ ਦਾਣ ਚ ਲੱਗਿਆ ਨਾਂ ਨੂੰ ਇਹਦਾ ਲਾਇਆ ਹੋਇਆ ਗੁਣ ਕਾਇਆ ਚ ਨਾ ਚ ਲੱਗਿਆ ਹੋਇਆ ਕੋਈ ਕਾਸੇ ਚ ਲੱਗਿਆ ਹੋਇਆ ਕੋਈ ਹਾਲ ਵਸ ਕੋਈ ਮਾਨ ਵਸ ਕੋਈ ਖੁਦੀ ਵਸ ਕੋਈ ਖੁਦੀ ਚ ਵਸਦਾ ਕੋਈ ਆਪਣੇ ਪੈਸੇ ਚ ਵਸਦਾ ਕੋਈ ਆਪਣੇ ਹਾਲ ਚੇ ਵਸਦਾ ਨਾਂ ਦੇ ਕਾਪੜੇ ਗੋਣ ਗੋਲ ਚ ਵਸਦਾ ਕੀ ਜੀ ਗੱਲ ਮੂਲ ਦੀ ਹੋਈ ਐ ਇੱਥੇ ਨਾ ਤੂੰ ਕਰਤਾ ਪੁਰਖ ਗੰਮ ਹੈ ਰਬਿਆ ਸਭ ਠਾਈ ਹਾਂ ਇਹ ਪਰਮੇਸ਼ਰ ਦੀ ਗੱਲ ਤਾਂ ਨਹੀਂ ਹੋ ਰਹੀ ਹਾਂ ਨਾ ਸਾਰੇ ਠਾਈ ਠਾਈ ਦੋ ਹਾਂਜੀ ਜੋਤ ਦੇ ਥਰੂ ਰਚਿਆ ਹੋਇਆ ਹੈ ਜੀ ਹਾਂਜੀ ਹਾਂਜੀ ਜੇ ਤੂੰ ਲਾਹੇ ਸੱਚਿਆ ਤਿਤਕੋ ਲੱਗੈ ਨਾਨਕ ਗੁਣ ਗਾਈ ਆ ਜਿੱਥੇ ਤੂੰ ਲਾ ਲਵੇਂ ਆਪਣੇ ਮਨ ਨੂੰ ਉਹ ਅਨੋਥੇ ਲੱਗਿਆ ਰਹਣਾ ਪੁਰਬਉ ਦੇਉ ਦਾ ਲੱਗੇ ਰਹੇ ਹਨ ਤੇਰਾ ਮਾਨਾ ਤੇਰੀ ਬੁੱਧਾ ਹੁਣ ਨਾਨਕ ਗੁਣ ਗਾਈ ਨਾਨਕ ਦੇ ਗੁਣ ਗਾਇਆ ਇਹ ਗੁਣ ਗਾਉਂ ਚਲਾਇਆ ਹੋਇਆ ਨਾਨਕ ਦੇ ਅੰਦਰ ਲੈਣੇ ਨਾਨਕ ਨੂੰ ਨਾਨਕ ਅੰਦਰਲਾ ਨਹੀਂ ਹੈ ਆਪੇ ਨਾਨਕ ਨੇ ਇਹ ਕੀਤਾ ਉਹ ਵੀ ਤਾਂ ਲੱਗਿਆ ਹੋਇਆ ਹੀ ਹੈ ਪਹਿਨਾ ਅੰਦਰ ਲੈਣੇ ਕਿਹਾ ਸੀ ਆਪਾਂ ਕਰੀਏ ਲਿਖਿਆ ਸੀ ਉਹ ਲਿਖਿਆ ਆ ਕਰਦਾ ਠੀਕ ਹੈ ਜੀ ਸਾਰੇ ਵੀ ਆਪਾਂ ਇਕੱਠੇ ਹੋ ਕੇ ਕਰ ਲੈਂਦੇ ਆ ਜੀ ਨਾਲੇ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੇਲਾਸ તથા ਮਾਲਦੇ ਦੀ ਧੁਨੀ ਗਾਵਣੀ ਇਹਦੀ ਵੀ ਨਾਲੇ ਸਮਾਪਤੀ ਹੈ ਜੀ ਇਸ ਤੋਂ ਬਾਅਦ ਇੱਕ ਵਾਰ ਹੋਰ ਹੈ ਪੋਤੀ ਸਾਹਿਬ ਵਿੱਚ ਦਰਜ ਉਹ ਹੈਗੀ ਕਾਂਗੜੀ ਕੀ ਵਾਰ